लोग मोहल्ला तीजा बिन सतगुरु सेवा जगत मूआ बिठ्ठा जन्म गवाए दूजे पाए हत दुख मर जम्मे आवे जाए ਏਵੇਂ ਯਾਰ ਤੋਂ ਬੁਵਾ ਸਾਰਾ ਸੰਭਾਰੀਆ ਇਥਾਲੋ ਥਾਂ ਨੇ ਐਵੇਂ ਹੀ ਲੱਗਦਾ ਥੋੜੂ ਜਿਉਂਦਾ ਪਾਤੀ ਹੋ ਗਈ 사જા ਜਿਆ ਐ ਤੇ ਇਦਨੇ ਕਰਦੇ ਨਾ ਇਹਨੇ ਵਸਤ ਮਾਣਨ ਦਾ ਖਾਇ ਬਟਲ ਆਏ ਜੀਵਨ ਸਾਜੇ ਭਾਈ ਜੇ ਤਾਂ ਕਹਦੇ ਜੀਵਨ ਸਾਜਣੇ ਸਾਡਾ ਜੀਵਨ ਸਾਜਣੇ ਤੇ ਜਿਹੜੀ ਮਾਈ ਐ ਆ ਦੇਖੋ ਮਾਈ ਲਿਖਿਆ ਨੂੰ ਮਾਂ ਗੁਰਮਤ ਨੂੰ ਉਜਿਆਨ ਉਹ ਜੀ ਕਹਿੰਦਾ ਬਾਤ ਆ ਜਗਤ ਵਿੱਚ ਚਾਲਿਆ ਮਾਰਨ ਲਿਖਾ ਕੇ ਪਹਿਲਾਂ ਮਾਰਨ ਦਿਖਾਏ ਮitteln ਵੀ ਆਏ ਜੀਵਨ ਸਾਜੇ ਭਾਈ ਇਹ ਗੁਰਮਤਿ ਰੁਕੀ ਭਾਈ ਦੇ ਜੀਵਨ ਸਾਜਣਾ ਤੇ ਪਿੱਛੇ ਨਹੀਂ ਲੱਗੇ ਸਤਗੁਰ ਦਾ ਬਚਨ ਵੀ ਬਦੇ ਤਾਂ ਬਿਰਥਾ ਸਾਰਾ ਜਲਬ ਬੁਆਇਆ ਜਗਤ ਸਾਰਾ ਭਰੀ ਜਾਂਦਾ ਜਗਤ ਮੁਵਾ ਬਿਰਥਾ ਜਲਬ ਬੁਆਇਆ ਆ ਜਾਨੂੰ ਹੀ ਰਾਜ ਨੂੰ ਵਿਰਥਾ ਕੋ ਬਲਦਾ ਕੋਈ ਕਹਿੰਦਾ ਹੈਗਾ ਨਹੀਂ ਸੁਣ ਰਿਹਾ ਉਹਦੀ ਗੱਲ ਨੂੰ ਨਹੀਂ ਮੰਨ ਰਿਹਾ ਉਹਦੀ ਗੱਲ ਨੂੰ ਬੰਦਾ ਪਤਾ ਹੈ ਹੀ ਪਰ ਤਨ ਰਾਗਿਆ ਹੈ ਠੀਕ ਹੈ ਜੀ ਦੂਜੇ ਭਾਏ ਅਤ ਦੁੱਖ ਲੱਗਾ ਮਰ ਜੰਮੇ ਆਵੇ ਜਾਈ ਦੂਜੇ ਭਾਏ ਦੂਜੇ ਭਾਏ ਕੇ ਦੀ ਬਾਯਾ ਦੀ ਦੋਈ ਜੀ ਬਾਇਆ ਠੁਕੀ ਹੈ। ਇਹ ਸੱਚ ਹੈ। ਤਿੱਜੀ ਤੋਂ ਕੀ ਜਰੀਏ ਤੇ ਉਹ ਬਾਇਆ ਉਹ ਕਮਾਂਵਾਂ ਲੱਗੇ ਹੋਏ ਨੇ ਇਹ ਪਾਏ। ਕਬੂਦ ਲੱਗੇ ਹੋਏ ਨੇ ਸੁਬਦ ਛੱਡੀ ਕੇ ਕਬੂਦ ਵਾਲੇ ਪਾਸੇ ਲੱਗੇ ਨੇ। ਦੂਜੇ ਪਾਏ ਹੱਥ ਦੁੱਖ ਲੱਗ ਨਾ ਦੋ। ਹੱਥ ਦਾ ਦੁੱਖੇ ਦੁੱਖਾਂ। ਬੁੱਦਲੇ ਪਾਸੇ ਜਾਂ। ਅੱਗੇ ਅਗਰ ਸਾਧਕ ਜੀ ਨੂੰ ਦੰਦੋਂ ਜਾਲ ਨੇ ਜਾਂ ਦੁੱਖ ਪਦਣਗੇ। ਵਰ ਜਮਾ ਵਾਜਾਏ ਪਜਲ ਮਰਜ ਪਾਏ ਜੰਮੀ ਜਾਂਦੇ ਨੇ ਗੁੜੀ ਜਾਂਦੇ ਯਾਦ ਤੱਕ ਜੂਨੀ ਪਾਏ ਨਾਨਕ ਬਿਨ ਨਾਮੈ ਜਮ ਮਾਰਸੀ ਅੰਤ ਗਿਆ ਪਛਤਾਏ ਵਿਸ਼ਟਾ ਜੀ ਆ ਮਾਇਆ ਭਾਇ ਅੰਵਿਸ਼ਟ ਹੈ ਵਿਸ਼ਟਾ ਦੇ ਅੰਦਰ ਵਾਸ ਹੈ ਭਾਇ ਦੇ ਜੂਨੀ ਪਾਏ ਦਿਸ਼ਾ ਦੇ ਵਿੱਚ ਜੋ ਵੀ ਮਾਇਆ ਦੇ ਅੰਦਰ ਫਿਰਫੜਦੀ ਆਸਰੀਰ ਬਿੜੀ ਜਾਂਦਾ ਤਰਿ ਜਾਂਦਾ ਆਈ ਜਾਂਦਾ ਜਾਈ ਜਾਂਦਾ ਆਈ ਜਾਂਦਾ ਜਾਈ ਜਾਂਦਾ ਜਾਣਕ ਜੇ ਨਾ ਆਵੜ ਜਲਵਾਸਤੀ ਇਹਦੇ ਕੋਲ ਲਵਲੀ ਹੈ ਸਾਤ ਗਿਆਨ ਦੀ ਨਾ ਹੈ ਆਤਮ ਗਰਥੀ ਨਾ ਹੈ ਜਿਹੜਾ ਜਦੋਂ ਜਮ ਮਾਰਦਾ ਜੰਮ ਕਾਲੂ ਮਾਰਦਾ ਕੋਈ ਚੱਲਦਾ ਹੈ ਆ ਸਰੀਰ ਉਹ ਭਰਮ ਦੇ ਮਾਰਦਾ ਇਹਨੂੰ ਹੋਰ ਨਹੀਂ ਕੁਝ ਪਾਦਾ ਜਦੋਂ ਭਰਮ ਹੈ ਤੇਰੇ ਭਰਮ ਨੇ ਕਹਿੰਦੇ ਤੈਨੂੰ ਮਾਰਵੇ ਤਾ ਨਾ ਭਰਮ ਇਹਨਾਂ ਨੂੰ ਮਾਰਦਾ ਅੰਤ ਗਿਆ ਬਚਾਈ ਅੰਤ ਬੜੇ ਕਸ਼ਟਾਂ ਨਾਲ ਪੈਦਾ ਵੀ ਦੀ ਗੱਲ ਤਾਂ ਗਲਤੀ ਕੀਤੀ ਇਹ ਪਛਤਾਵਾ ਹੋਊਗਾ ਉਸ ਵੇਲੇ ਸੁਣੀ ਮਹੱਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਾਵਕਾਂ ਟੱਤ ਭੋਗ ਵੈ ਅਲਪਤ ਰਹਿ ਅਲਖ ਨ ਜਾਈ ਦੇਖੋ ਇਸ ਦੋਖੀ ਦਾ ਬੜਾ ਬਿੱਸੂ ਕਰਦੇ ਨੇ ਇਸ ਜਗਮਲਪੁਰ ਕੇ ਕਹੇ ਇਹਦਾ ਉਹ ਸ਼ਬਦ ਗੁਰੂ ਉਹ ਤਾਂ ਇੱਕੋ ਹੀ ਆ ਉਹ ਕੋਮਤੋ ਇੱਕੋ ਹੀ ਆ ਦੂਆ ਉਹ ਕਹਤੌਦੇ ਦੀ ਜਿਹੜਾ ਸਾਡਾ ਮੁਕਬੀ ਜੀ ਬੰਦ ਨਾ ਹੋਰ ਛੜਲੀ ਨਾਲ ਸਪਾਈ ਉਹਦੇ ਅਧਿ 504 ਗੱਲ ਦੇ ਆਰੀ ਬਣ ਨਾ ਲਫਜ਼ ਹਾਂਜੀ ਉਹੇ ਦਰਜੇ ਦਾ ਜਿਹੜਾ ਹੁੰਦਾ ਨਾ ਉਹ ਨਾਰਾ ਪਹਿਲੇ ਦਰਜੇ ਦਾ ਪੁਰਖ ਇੱਕ ਜਨਮ ਜਿਹੜਾ ਥੱਲੇ ਹੈ ਉਹ ਹਰ ਤਾਂ ਇੱਕ ਜਨਮ ਉੱਪਰ ਵਾਲਾ ਆਦਮੀ ਜਿੰਨੀ ਆਤਮਾਆਂ ਸਾਰੀਆਂ ਸੰਸਾਰ ਚ ਇਹਨਾਂ ਨੂੰ ਜਿਹੜਾ ਦੱਖ ਉਪਰ ਆਰਥ ਬਿਲਦਾ ਵਾਲਿਆਂ ਨੂੰ ਜਿਹੜਾ ਬਾਜ਼ਾਰ ਮਿਲਿਆ ਹੋਇਆ ਇਹ ਸੰਸਾਰ ਤੇ ਜਰੀਰ ਕਰਕੇ ਨਾਲ ਨਹੀਂ ਗਿਆ ਹੋਇਆ ਇਹ ਦਾ ਜਨਮ ਦੀ ਬਣਿਆ ਤਾਂ ਨਾਰ ਕਿਹਾ ਨੇ ਇਹ ਸਾਰੇ ਭੈ ਵਿੱਚ ਸੂਰਜ ਜਿੰਨੀ ਰਚਨਾ ਦੇ ਅੰਦਰ ਸਾਰਾ ਉਹਦੇ ਹੁਕਮ ਦੇ ਵਿੱਚ ਸਵਾਈ ਕਿ ਹੈ ਉਹ ਹੁਕਮ ਕਰਨ ਵਾਲੇ ਹੈ ਜੀ ਨਾ ਹੁਣ ਹੁਣ ਕਰਨਾ ਵਾਏ ਤਾਂ ਪੋਦੇ ਨੇ ਨੇਕ ਹੈ ਫਿਰ ਇਹ ਤਾਂ ਉਸ ਪਾਸੇ ਨੇ ਜ਼ਮੀਰ ਕੀਤੀ ਹੈ ਗੱਲ ਜੋਤ ਕਰਕੇ ਤਾਂ ਨੇਕ ਉੱਥੇ ਨਹੀਂ ਦੇ ਵਿੱਚ ਕਿੱਦਾਂ ਬੈਠੇ ਜੀ ਹੁਕਮ ਉਹਨਾਂ ਦਾ ਇੱਕ ਹੈ ਸਾਰੀ ਉਹਨਾਂ ਦਾ ਰੈਂਕ ਹੈ ਉਹਨਾਂ ਨੇ ਹੁਕਮ ਉਹਨਾਂ ਦੀ ਮਨਸੱਤੇ ਹੈ ਜਦ ਇਹ ਫਿਰ ਇਹ ਤਾਂ ਠੀਕ ਹੈ ਤੇ ਜਿਨ੍ਹਾਂ ਤੇ ਫਿਰ ਉਹਨਾਂ ਦਾ ਹੁਕਮ ਚੱਲਦਾ ਹੈਗਾ ਜਿਹੜੀ ਬਾਕੀ ਸ੍ਰਿਸ਼ਟੀ ਆ ਨਾਰ ਸਬਾਈ ਹੋ ਗਈ ਹੈ ਜੀ ਆਹ ਬਾਕੀ ਸਾਬ ਠੀਕ ਹੈ ਜੀ ਸਭ ਜਾਈ ਸਭ ਘਟ ਭੋਗ ਵਾ ਸਾਰਿਆਂ ਦੇ ਹਿਰਦੇ ਚ ਜਦੇ ਚੈ ਤਾਂ ਆਂਦੀ ਆ ਦਾ ਸਭ ਘਟ ਭੋਗ ਵਾ ਅਦੇ ਪਤਰਾ ਹੈ ਫੇਰ ਵੀ ਮਾਇਆ ਦੌਲਤ ਹੈ ਉਹ ਅਗਲੇ ਪਤੀ ਅੱਖ ਨਾਲ ਦੀ ਗਿਆਨ ਤੇ ਯਾਦ ਉਹ ਜਿਹੜਾ ਭਰੇ ਸਾਡੇ ਗਿਆਨ ਨੂੰ ਗੁਰੂ ਰੱਖਦੇ ਅਸਲ ਦੇ ਵਿੱਚ ਅੱਖਾਂ ਨਾਲ ਦੇਖਣ ਵਾਲੀ ਗੱਲ ਦੀ ਉਹ ਰੜ ਤੋਂ ਵੀ ਛੱਲੇ ਆਪਾਂ ਮਹਿਸੂਸ ਬੜੀ ਕਰ ਸਕਦੇ ਗਰਮੀ ਸਰਦੀ ਵਾਲਾ ਅਸਰ ਵੀ ਹੈ ਉਹਦੇ ਵਿੱਚ ਗਿਆਨ ਦੇ ਰਾਹ ਉੱਪਰ ਹੈ ਉਹ ਰਖੂਦ ਕਿ ਪਾਜੀ ਪ੍ਰਕਾਰ ਤੇ ਸਾਡੇ ਕੋਲ ਇੱਕ ਸਾਡੇ ਕੋਲ ਬੁੱਧੀ ਹੈ ਬੁੱਧ ਵਾਲ ਨਾਲ ਵੀ ਬਹੁਤ ਪਛਾਣ ਲਏ ਪੂਰੇ ਗੁਰਵੇ ਖਾਲਿਆ ਸ਼ਬਦੇ ਸੋਜੀ ਪਾਈ ਬਾਹਰ ਦਾ ਹੋ ਗਈ ਗੱਲ ਪੂਰਾ ਜਦ ਗਿਆਨ ਹੋ ਜਾਂਦਾ ਤਾਂ ਤਾ ਸ਼ਰੂਦਾ ਪੂਰੇ ਗਿਆਨ ਵਾਲੇ ਨੂੰ ਧਰਤੀ ਦੀਆਂ ਖੋਲਿਆ ਨਾ ਬੇਖ ਬੁੱਧੀ ਜਲਵਾਦ ਬਦਲਦੀ ਆ ਫੇਰ ਕਹਨੇ ਦਰਸ਼ਨ ਹੁੰਦਾ ਫੇਰ ਪਤਾ ਲੱਗਦਾ ਪੂਰੇ ਗੁਰ ਬੇਖਿਆ ਲਿਆ ਪੂਰੇ ਗੁਰ ਦੇ ਦਰਸ਼ ਕਰਵਾਇਆ ਗਿਆਨ ਦਾ ਜਿਹੜਾ ਉਪਦੇਸ਼ ਹੈ ਨਾ ਗੁਰਬਾਣੀ ਦਾ ਇਹਦੇ ਨਾਲੇ ਸੋਜੀ ਹੈ ਉਹ ਸੁਰਜੀ ਹੋਣੀ ਦਰਸ਼ਨ ਬਸ ਮਕਾਤ ਗੱਲ ਸੋਜੀ ਹੋਣਾ ਸਭ ਨਹੀਂ ਆਉਂਦੀ ਦਰਸ਼ਨ ਸ਼ਬਦ ਸੋਜੀ ਪਾਈ ਸੋਜੀ ਪਾਈ ਹੀ ਦਰਸ਼ਨ ਠੀਕ ਹੈ ਜੀ ਪੁਰਖੇ ਸੇਵਾਂ ਤੇ ਪੁਰਖ ਸ਼ਬਦ ਜਲਾਈ ਤਿਸ ਦਾ ਕੋ ਨਹੀਂ ਨਾ ਕੋ ਕੰਟਕ ਵੈਰਾਈ ਜਿਹੜੇ ਕਰਤੇ ਪੁਰਖ ਨੂੰ ਸੇਵਦੇ ਨੇ ਉਹ ਕਰਤੇ ਪੁਰਖ ਉਹਦੇ ਲਈ ਰੁਜ ਜਾਂਦੇ ਜੈਸਾ ਸੇਵੇ ਤੈਸਾ ਹੋਏ ਔਰ ਉਹ ਵਰਗੇ ਨੇ ਉਹਦੇ ਵਿੱਚੇ ਹੀ ਲੀਰ ਹੋ ਜਾਂਦੇ ਨੇ ਪੁਰਖੇ ਸੇਵੈਂ ਛੇ ਪੁਰਖ ਹੋਵਾਂ ਅਨੇਕ ਹੈ ਫਿਰ ਇੱਕ ਹੈਂਦੀ ਗੱਲ ਹੋ ਗਈ ਇੱਥੇ ਮਤਲਬ ਬਹੁਵਚਨ ਸੇਵਦੇ ਆ ਉਹਦੇ ਵਰਗੇ ਹੋ ਜਾਂਦੇ ਅਨੇਕ ਹੈ ਫਰੇਕ ਕੋਈ ਹੋ ਜਾਂਦਾ ਨੇ ਖਬਜ ਲੱਲੀਆਂ ਹੋ ਜਾਂਦੇ ਆਵਾਜ਼ ਕਸਮ ਠੀਕ ਹੈ ਜੀ ਜਿੰਨੀ ਹੋਮੈ ਸ਼ਬਦ ਜਲਾਈ ਜਿਨ੍ਹਾਂ ਨੇ ਹੁਬ ਜੜਾ ਤੀਨਾ ਆਪਣੇ ਨਤਰ ਨੂੰ ਗੁਰਤੀ ਬਤਨ ਵਾਲਾ ਜਾਂ ਗੁਰ ਉਪਦੇਸ਼ਾਂ ਜੜਾਤੀ ਉਹ ਹੁੰਦੇ ਨੇ ਐਵੇਂ ਹੀ ਹੁੰਦੇ ਤੇ ਉਹਨੂੰ ਜਗਾਉਣਾ ਗੁਰਬਾਣੀ ਨੂੰ ਬੋਲਣਾ ਸ਼ਬਦ ਦਾ ਗਿਣਾ ਸ਼ਬਦ ਹੁਦਣੇ ਤੇ ਉਪਦੇਸ਼ ਗੁਰਬਾਣੀ ਦਾ ਉਪਦੇਸ਼ ਸ਼ਬਦ ਹੁੰਦਾ ਇਹਦੇ ਨਾਲ ਹੋਬੇ ਜਲ ਜਾਂਦੀ ਹੈ ਠੀਕ ਹੈ ਤੇ ਇਸਕਾ ਕੋ ਨਹੀਂ ਨਾ ਕੋ ਕੰਟਕ ਵਹਿਰਾਇ ਕੋਈ ਸ਼ਰੀਰ ਨਹੀਂ ਹੁੰਦਾ ਤੇ ਕੋ ਦਾ ਕੋਈ ਵੀ ਬੁੱਧ ਕੋ ਥੇ ਹੁੰਦਾ ਜਿੱਥੇ ਮਤ ਭੇਜਦੇ ਹੋਗੇ ਮਤ ਭੇਜਦੀ ਦਾ ਕਿਹੜੀ ਗੱਲ ਦਾ ਕਿਤੇ ਮਤ ਸਾਬਤ ਕਰਨ ਫੇਰ ਉਹਨੂੰ ਸ਼ਰੀਕ ਕਹਿ ਸਕਦੇ। ਸ਼ੱਕ ਦਾ ਸ਼ਰੀਕ ਅਜੇ ਤੱਕ ਨਾ ਹੋਇਆ ਨਾ ਹੋਊਗਾ। ਸ਼ੱਕ ਦਾ ਸ਼ਰੀਕ ਹੋਣਾ ਨਹੀਂ ਗਾ। ਸ਼ੱਕ ਦੇ ਵਿਰੋਧ ਦਾ ਝੂਠ ਜਰੂਰ ਖੜਾ ਹੈ ਪਰ ਸ਼ਰੀਕ ਨਹੀਂ ਹੈ। ਉਹ ਬਰਾਬਰ ਦਾ ਕੋਈ ਨਹੀਂ ਹੈ। ਠੀਕ ਹੈ। ਨਾ ਕਟਕ ਵੈਰ ਨਾ ਕੋਈ ਉਹਦਾ ਕੋਈ ਦੁੱਖ ਪਚਾ ਸਕਦਾ ਨਾ ਕੋਈ ਉਹਦਾ ਵੈਰੀ ਹੈ। ਕਟਕ ਹੁੰਦਾ ਉਹਦੇ ਵਾਸਤੇ ਦੁੱਖਦਾ ਹੈ। ਇਹ ਜੇ ਕਾਲਖੰਟਕ ਮਾਰਿਆ ਉਹੀ ਗੱਲ ਹੈ ਹਾਂ ਕੋਈ ਨਾ ਕੋਈ ਕਟਕਾ ਨਾ ਕੋਈ ਦੁੱਖ ਪਚਾ ਸਕਦਾ ਨਾ ਕੋਈ ਉਹਦੇ ਨੂੰ ਫੈਰ ਕਮਾ ਸਕਦਾ ਠੀਕ ਹੈ ਜੀ ਨਿਹਚਲ ਰਾਜ ਹੈ ਸਦਾ ਕਿਸ ਨਾ ਆਵੇ ਨਾ ਜਾਈ ਆਂ ਕੇ ਗੁਣ ਗਾਈ ਇਸੇ ਕਰਕੇ ਚੰਬੇ ਉਹਦਾ ਕੋਈ ਬਹਿ ਨਹੀਂ ਬਹਿ ਕਰ ਸਕਦਾ ਨਾ ਕੋਈ ਉਹਨੂੰ ਦੁੱਖ ਪਚਾ ਸਕਦਾ ਨਾ ਕੋਈ ਉਹਦਾ ਸ਼ਰੀਕ ਹੈ ਇਸ ਕਰਕੇ ਪਰਮੇਸ਼ਰ ਦਾ ਜਿਹੜਾ ਰਾਜ ਹੈ ਸਦਾ ਰਿਚਲੇ ਉਹ ਜਿਹੜਾ ਰਾਜ ਕਰੇ ਦਾ ਖਾਲਸਾ ਲਫਜ਼ ਹੈ ਨਾ ਅਰਥ ਉਹਦੇ ਇੱਥੇ ਉਹ ਬੜਾ ਨੇਫੀ ਠੀਕ ਹੈ ਜੀ ਉਹ ਰਾਜ ਕਰੂ ਭਈ ਖਾਲਸਾ ਪਰਮੇਸ਼ਰ ਰਾਜ ਕਰੂਗਾ ਜਿਹਦੀ ਹਿੱਮਤ ਹਟਾ ਕੇ ਦਿਖਾਓ ਅਰਥ ਇਹ ਹੈ ਉਹ ਗੁਰਦਾਇਤਾ ਹੈ ਕਿ ਇਹ ਗਹਾਂ ਨੂੰ ਇਹ ਹੀ ਕਰੂਗਾ ਕੋਈ ਵੀ ਜਬਲਾਉਦਾ ਰਾਜ ਹਟਾਉਣ ਵਾਲਾ ਅੱਗੇ ਵਾਸਤੇ ਵੀ ਗੁਰਮਖੀ ਅਰਥ ਇਹ ਨੇ ਵਿਗਾੜ ਕੇ ਅਰਥ ਸਿੰਘ ਰਾਜ ਨੂੰ ਖਾਲਸਾ ਦਾ ਰਾਜ ਪਤਾ ਨਹੀਂ ਕਿ ਫਿਰ ਸਿੱਖ ਰਾਜ ਕਿਹਾ ਹੈ ਕਹਿ ਨਹੀਂ ਦਿੱਤਾ ਗਾਲੀ ਘੂਲੋ ਸਭ ਇਹ ਤਾਂ ਵਿੱਚ ਸਿੱਖ ਰਾਜ ਹੈ ਖਾਲਸਾ ਦਾ ਰਾਜ ਨਹੀਂ ਹੈ ਖਾਲਸਾ ਦਾ ਪਰਵਿਸ਼ਾਰ ਅਸਲ ਦੇ ਵਿੱਚ ਉਹਰ ਆ ਜਾ ਸਾਰੀ ਸਿੱਧੀ ਤਈਆ ਆ ਆ ਬੈਲੋ ਜਾਈ ਕਿਉਂਕਿ ਤੇ ਇਸ ਕਰਕੇ ਉਹਦਾ ਸਦਾ ਹੀ ਇਲਾਜ ਹੈ ਠੀਕ ਹੈ ਜੀ ਅੰਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਇਸ ਕਰਕੇ ਜਿਹੜੇ ਉਹਦੇ ਸੇਵਕ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰ ਸਿੱਖ ਦੀ ਸੇਵਾ ਕਰਦੇ ਨੇ ਉਹਦਾ ਜਸ ਕਰਦੇ ਨੇ ਲੋਕਾਂ ਨੂੰ ਸੁਭਝਾਉਂਦੇ ਨੇ ਭਾਈ ਐ ਨਾ ਚੱਲੋਂਗੇ ਸੁਖਾ ਉਹਦੇ ਹੁਕਮ ਪਾੜੀ ਚੱਲੋਂਗੇ ਸੁਖਾ ਉਹਦੇ ਵਿੱਚੇ ਹੀ ਜਾ ਬਣੂ ਕਿ ਮੈਂ ਘਰ ਚ ਲੈ ਜਾਉਂਗੇ ਕਿਉਂਕਿ ਬਥੂਕੇ ਵਿਰੋਧ ਨਹੀਂ ਕਰਨਾ ਹੁਕਮ ਦਾ ਨਹੀਂ ਵਿਰੋਧ ਕਰ ਇਹ ਸੇਵਾ ਹੀ ਐ ਐਨਾ ਦਸਨੀ ਸਾਲ ਤੋਂ ਨੂੰ ਸੇਵਾ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਹੋਰ ਸੇਵਾ ਕੀ ਕਰ ਸਕਦੇ ਸਾਡੇ ਦਾ ਹੱਥ ਵਸੇ ਦੀ ਕੋਸ਼ਿਸ਼ ਨੂੰ ਜਲਦਾ ਕੇ ਵਸ ਕੁਛ ਨਹੀਂ ਸਾਡੇ ਵਾਸਤੇ ਕੁਛ ਨਹੀਂ ਅਸੀਂ ਸੇਵਾ ਕੀ ਕਰਦੀ ਅਸੀਂ ਤਾਂ ਬੋਲ ਕੇ ਆ ਜਿਹੜਾ ਐਨੀ ਗੱਲ ਸਮਝਾ ਦੇਣੀ ਹੈ ਨਾ ਜਦੋਂ ਅਸੀਂ ਇਹੀ ਸੇਵਾ ਪਵਨਕ ਦੀ ਸੇਵਾ ਤਾਂ ਥਾਰੇ ਜੀ ਤੇ ਜੀ ਤੂੰ ਜੀਵਨ ਦਾ ਦਾਤਾ ਰਾ ਜੀ ਉਹਦੇ ਦਾਤਾ ਰਾ ਹੈ ਉਹ ਚਾਹੁੰਦਾ ਵੀ ਇਹਨੂੰ ਸੱਚੇ ਤੇ ਪਾਓ ਕਬੜਿਆਂ ਨੂੰ ਉਹ ਲੜਾਲੂ ਕੋ ਲਿਆ ਨੂੰ ਕਿੱਦੇ ਰਾਸਤੇ ਪਾਓ ਤੁਹਾਡੀ ਸੇਵਾ ਦਰਗਾਹ ਦੇ ਪ੍ਰਮਾਣ ਠੀਕ ਹੈ ਜੀ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਨਾਨਕ ਦਾ ਕਹਿ ਰਿਹਾ ਕਿ ਵੇਖ ਲਿਆ ਇਹ ਦੁਬਿਲੇ ਗੱਲ ਹੈ ਸਾਰੀ ਉਹਦੇ ਅੰਦਰ ਵਿਗਸਿਆ ਪੈਦਾ ਹੋ ਗਿਆ ਰੋਸ਼ਨੀ ਪੈਦਾ ਹੋ ਗਿਆ ਉਹਦੇ ਨਾਲ ਪਰਮ ਆਨੰਦ ਦੀ ਅਵਸਥਾ ਨੂੰ ਬਿਰਥਿਆ ਕਰਦੇ ਨੇ ਇੱਕੋ ਆਨੰਦ ਇੱਕੋ ਪਰਮ ਆਨੰਦ ਠੀਕ ਹੈ ਜੀ ਸੁਭੇਸ਼ਾ ਲਈ ਅਡੋਲ ਰਹੂ ਹਰ ਸੱਤੇ ਦੀ ਵਡਿਆ ਉਹਦੇ ਵਾਸਤੇ ਤਾਂ ਹਰ ਸੱਤੇ ਦੀ ਵਡਿਆਈ ਹੀ ਉਹਦੀ ਖਰਾਬ ਹੈ ਹਰ ਸੱਤੇ ਦੀ ਵਡਿਆਈ ਹੀ ਉਹਦਾ ਸ਼ੌਕ ਹੈ ਹਰ ਸੱਤੇ ਦੀ ਵਡਿਆਈ ਹੀ ਉਹਦੀ ਖਰਾਕ ਹੈ ਹਰ ਸੱਤੇ ਦੀ ਵਡਿਆਈ ਦੇ ਵਿੱਚ ਜੀਵਨ ਠੀਕ ਹੈ ਕਰ ਲੱਗਿਆ ਹੋਇਆ ਫਰਸਟ ਪਰਸਨ ਚ ਗੱਲ ਕਰ ਰਹੇ ਆ ਆਪਣੇ ਆਪਣੀ ਹੱਡਬੀਤੀ ਜੀ ਆ ਹੱਡਬੀਤੀ ਹੱਡਬੀਤੀ ਵੀ ਐ ਉਪਦੇਸ਼ ਦੀ ਐ ਕੋਈ ਗੱਲਾਂ ਸਦ ਹਿਰਦੈ ਹਰ ਤਿਨਕੋ ਰਖਣਹਾਰ ਆ ਦੇਖੋ ਉਸੇ ਗਾਲ ਨੂੰ ਅਗੇ ਤੋਰਦੇ ਆ ਹਾਂਜੀ ਜਿਹੜੀ ਗੱਲ ਕਹਿਦੇ ਆ ਜਿਨ ਕਹਿ ਹਰ ਨਾਮ ਵਸਿਆ ਸਾਦੇ ਹਿਰਦੇ ਦੇ ਦੇਖੋ ਨਾ ਪਿੱਛੇ ਆ ਕੇ ਗੁਰੂਆਂ ਦੇ ਬਾਦ ਪਟ ਹੋਏ ਤੇ ਸੱਤਾ ਬਲਵੰਦ ਹੋਇਆ ਹਾਜ਼ਰੀ ਕਿ ਹੋਈ ਜੀ ਹੋਇਆ ਇਹ ਤਾਂ ਗੁਰੂ ਕੀ ਹਾਜ਼ਰੀ ਨ ਗੁਰ ਸਿੱਖੇ ਹੋਏ ਜਲ ਬੰਦਨ ਦੇਖੀ ਹੈ ਮਰਬਾਨੀ ਨੂੰ ਸਮਝਣਾ ਹੰਬੰਦ ਜਿਨ ਕਹਿ ਹਰ ਨਾਮ ਵਸਿਆ ਸਾਦੇ ਹਿਰਦੇ ਜਿਨ੍ਹਾਂ ਦੇ ਹਰ ਕਾਰਨ ਸਦਾ ਹਿਰਦੇ ਵਸਿਆ ਰਹਦਾ ਇਨਾ ਦੇ ਅੰਦਰ ਗੁਰਬਾਣੀ ਦਾ ਵਿਚਾਰ ਸਦਾ ਚੱਲਦਾ ਰਹਿੰਦਾ ਸਦਾ ਹਿਰਦੇ ਵਿੱਚ ਚੱਲਦਾ ਰਹਿੰਦਾ ਨਾ ਕੁਝ ਉਹਨਾਂ ਨੂੰ ਮਿਲਦਾ ਹੀ ਜਿਹੜੇ ਲੜਤੇ ਰਹਿੰਦੇ ਨੇ ਕੁਝ ਨਾ ਕੁਝ ਵਿੱਚੋਂ ਮਿਲਦਾ ਹੀ ਰਹਿੰਦਾ। ਤਿੰਨ ਗੁਰੂਆਂ ਤਿਨ ਖਾਇਆ। ਅਬਰ ਬਲਵਣਸਾਨ। ਹਾਂਜੀ ਹਰ ਤਿੰਨ ਕੋ ਰੱਖਣ ਉਹਨਾਂ ਦੀ ਰੱਖਿਆ ਕੌਣ ਕਿੰਨਾ ਕਰਦੀ ਹੈ ਕਾਲ ਤੋਂ ਜਦੋਂ ਮੈਂ ਵੀ ਕੱਕੇ ਦੇ ਟਿੱਪੀ ਗਲਤੀ ਨਾਲ ਲਾਈ ਹੋਈ ਜੀ ਹਰਨਾਮ ਤਿੰਨ ਕੋ ਰੱਖਣ ਹਾਰਾ ਹਰਨਾਮ ਪਿਤਾ ਹਰਨਾਮੋ ਮਾਤਾ ਹਰਨਾਮ ਸਖਾਈ ਮਿੱਤਰ ਹਮਾਰਾ ਆ ਦੇਖੋ ਪਿਤਾ ਮਾਤਾ ਸੰਸਾਰੀ ਰਿਸ਼ਤੇ ਗਏ ਆਤਮਾ ਦੇ ਰਿਸ਼ਤੇ ਗੱਲ ਹੈ ਸੰਸਾਰੀ ਰਿਸ਼ਤੇ ਦੀ ਗੱਲ ਨਹੀਂ ਹਰ ਮਾਤਾ ਹਰ ਨਾਨਾ ਬੋਤਾ ਅਰ ਨਾਮਾ ਮਾਤਾ ਮਾਤਾ ਬੇਤਾ ਉਹਨਾਂ ਦਾ ਰਖਸ਼ਤ ਹੈ ਸਖਾਈ ਰਿਸ਼ਤੇ ਸਭ ਤੋਂ ਪਿਆਰਾ ਰਿਸ਼ਤਾ ਹਰ ਮਾਮ ਦੀ ਅੰਛੇ ਨੂੰ ਉਹ ਹਰ ਰੂਪ ਲੇਖੋ ਬਿੱਤਰ ਹਮਾਰਾ ਸਖਾਈ ਬਿੱਤਰ ਹਮਾਰਾ ਬਿੱਤਰ ਵੀ ਸਖਾਈ ਵੀ ਸਖਾ ਬਹੁਤ ਨਜ਼ਦੀਕੀ ਅਤੇਮਤ ਨਜ਼ਦੀਕੀ ਨੂੰ ਸਖਾ ਕਹਿੰਦੇ ਨੇ ਜਿਵੇਂ ਭਾਈ ਜਿਹੜਾ ਇੱਕਾਂ ਪਿਓ ਦੇ ਨਾਲ ਸਖੇ ਹੁੰਦੇ ਨੇ ਆਪਾਂ ਸਖਾ ਕਹਿੰਦੇ ਆ ਪੰਜਾਬੀ ਚ ਸਖਾ ਲਾਉਂਦੇ ਦੀ ਪਿਓ ਦੇ ਜਿਹੜੇ ਨੇ ਜਿਹੜਾ ਸਖਾ ਹੈ ਉਹ ਮਿੱਤਰ ਹਮਾਰਾ ਜਿਹੜੇ ਗੁਰਮਖਿ ਨੇ ਉਹ ਸਾਰੇ ਅਬਦੁੱਲ ਕੀ ਬਿੱਤਰ ਨੇ ਕਹਿੰਦੇ ਸੋ ਵੀ ਤੋ ਹਮਾਰਾ ਵੀਰ ਕਹਿੰਦਾ ਜੇ ਐਸਾ ਕਰ ਪੁਜੀਆ ਸੋ ਵੀ ਤੋ ਹਮਾਰਾ ਜੀ ਜੀ ਹਰ ਨਾਮੇ ਨਾਲ ਗੱਲਾਂ ਹਰ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਉਹ ਕਹਿੰਦੇ ਗੱਲਾਂ ਕਿਹਦੇ ਨਾਲ ਕਰਦੇ ਨੇ ਲੋਕ ਸਾਰੇ ਗੱਲਾਂ ਦੀ ਗੁਰਬਾਨੀ ਨਾਲੇ ਗੱਲਾਂ ਦੇ ਕਰਦੇ ਬਾਕੀ ਤਾਂ ਦੁਨੀਆਂ ਤੋਂ ਮੇਰਾ ਠਾਠਾ ਦਾਦਾ ਉਹ ਗਾਟੋ ਕੁਤਕੁਲੀਆਂ ਗੱਲਾਂ ਨੇ ਅਫਜ਼ਲੀ ਗੱਲ ਬਾਣੀ ਦਾ ਲੈ ਠੀਕ ਹੈ ਜੀ ਹਰ ਨਾਵੇਂ ਨਾਲ ਗੱਲਾਂ ਹਰ ਨਾਵੇਂ ਨਾਲ ਮਸਲਤ ਹਰ ਨਿਤ ਸਾਰਾ ਅਸਲੋਂ ਦੋ ਆਪਾਂ ਬਚੋਰਾ ਕਰਦੇ ਵੀ ਜਦਾਂ ਮੈਂ ਬਚੋਰਾ ਨਹੀਂ ਕਰਦੇ ਹਾਂਜੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਸਾਡਾ ਕੁਰਬਾਨੀ ਨਾਲ ਇਹ ਚਲੋ ਕੁਰਬਾਨੀ ਨਾਲ ਸਵਾਇਆ ਜੋ ਸੁਣਾ ਲੈਣੀ ਹੈ ਕੁਰਬਾਨੀ ਤੋਂ ਲੈਣੀ ਹੈ ਜੋ ਮਸਲੇ ਨੇ ਕੁਰਬਾਨੀ ਅੱਗੇ ਰੱਖਣੇ ਨੇ ਲੋੜੀਏ ਕਾਂਪਸ ਤੋਂ ਹਰ ਪਾਇਆ ਕਾਰਜ ਤੇ ਸਵਾਰ ਸਤਿਗੁਰ ਸਾਚ ਪਾਖੀ ਬਸ ਉਹੀ ਗੱਲ ਆ ਗਈ ਇੱਥੇ ਠੀਕ ਹੈ ਹਰਨਾਮ ਹਮਾਰੀ ਕਰਦਾ ਨਿਤ ਸਾਰਾ ਅੱਡਾ ਹਰ ਵਕਤ ਖਿਆਲ ਅੱਡਾ ਉਰੇ ਕੇ ਪੈਦਾ ਕਰਕੇ ਉਹਨੂੰ ਚੜ ਦਿੱਤੇ ਜਿਹੜਾ ਆਪੇ ਫੜਦੇ ਹੈ ਥਾ ਕੋ ਜਨੋ ਦਾ ਪਹਿਲਾ ਪਿਆ ਠੀਕ ਹੈ ਜੀ ਕਹਿੰਦਾ ਮਤਲਬ ਜੋਤ ਦੀ ਜੇ ਇੱਥੇ ਜੋਤ ਪੈਦਾ ਕੀਤੀ ਹੈ ਉਹਦੇ ਨਾਲ ਸਰੀਰ ਹੈ ਉਹ ਸਰੀਰ ਔਰ ਜੋਤ ਦੋਹਾਂ ਦਾ ਖਿਆਲ ਰੱਖਦਾ ਹੈ ਉਹ ਭੁੱਲਣਾ ਠੀਕ ਹੈ ਜੀ ਹਾਂ ਜੀ ਭੁੱਲਣਾ ਉਹ ਤਾਂ ਕਿਸੇ ਨੂੰ ਨਹੀਂ ਪਤਾ ਕਿਸੇ ਵਗੇ ਹਰ ਬਗੀ ਜਿਨਤਾ ਦੇ ਸਭਾ ਕੋ ਤਿੱਤਾ ਸਾਰਿਆ ਵੀ ਜਿਨਤਾ ਹੁਰ ਤਿੱਤਾ ਹੈ ਧਾਰੇ ਰੂਪ ਠੀਕ ਹੈ ਜੀ ਹਰ ਨਾਮ ਹਮਾਰੀ ਸੰਗਤ ਅਤ ਹਰ ਨਾਮ ਕੁੱਲ ਹਰ ਨਾਮ ਹਰ ਨਾਮ ਸਾਡੀ ਸੰਗਤ ਤਾਂ ਪਿਆਰੀ ਸਭ ਤੋਂ ਪਿਆ ਸੰਗਤ ਦਾ ਹੁਰ ਵੀ ਹੈ ਅੰਦਰਤ ਬਾਹਰ ਵੀ ਹੁੰਦੀ ਹੈ ਪਰ ਅਤ ਪਿਆਰੀ ਜਿਹੜੀ ਸਭ ਤੋਂ ਪਿਆਰੀ ਸਤਿਗੁਰੂ ਠੀਕ ਹੈ ਕਿ ਹਰ ਨਾਮ ਦੀ ਗੱਲ ਹੋ ਰਹੀ ਹੈ ਜਿਹੜਾ ਨਾਮ ਪਦਾਰਥ ਦੀ ਨਹੀਂ ਹੁਕਮ ਨਾਲ ਜੁੜਿਆ ਹੋਇਆ ਠੀਕ ਹੈ ਜੁੜੀ ਹੋਈ ਹੈ ਥੋੜੇ ਸ਼ਬਦ ਦਾ ਮੇਲ ਹੈ ਸੱਦਕਾ ਹੋ ਠੀਕ ਹੈ ਜੀ ਹਰ ਨਾਮ ਹਰ ਨਾਮ ਕੁਲ ਨਾਮ ਪਰਵਾਹ ਜੇ ਨਾਮ ਦੀ ਗੱਲ ਆਈ ਹੈ ਨਾ ਹਰ ਨਾਮ ਦੀ ਉਹ ਤੇ ਇੱਕੋ ਨਾਮ ਹੁਕਮ ਹੈ ਗੁਰਸਤਗੁਰੂ ਦੀ ਆਵਜਾਏ ਜੀ ਉਹ ਆਹ ਤੁਸ ਚਬਰ ਦਾ ਬੀਲੇ ਹਰ ਨਾਮ ਕੁਲ ਹਰ ਨਾਮ ਪਰਿਵਾਰ ਉਹ ਪਰਿਵਾਰ ਹੈ ਦੇਖੋ ਨਾ ਪਰਿਵਾਰ ਉਹਦੇ ਪਰਿਵਾਰ ਆਪੇ ਹੋ ਗਿਆ ਉਹਦੇ ਵਿੱਚ ਸਾਰੇ ਬੱਚੇ ਸਮਾਏ ਹੋਏ ਠੀਕ ਹੈ ਅਨੇਕ ਬਣੀ ਨਾ ਸੰਗਤ ਵੀ ਹੋਈ ਬਣੀ ਸਭ ਕੁਝ ਰਿਸ਼ਤੇਦਾਰੀ ਵੀ ਉਹੀ ਬਣੀ ਬਿੱਤਰ ਵੀ ਸਾਰੇ ਉਹੀ ਬਣ ਕੇ ਐ ਬਣੇ ਦੇ ਸਾਰੇ ਠੀਕ ਹੈ ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨਿਸਤਾਰ ਆ ਜਿਹੜਾ ਨਾਮ ਦੀਆ ਇਹ ਗਿਆਨ ਇਹ ਜਿਹੜਾ ਜਿੱਤਿਆ ਸਾਧੂ ਇਹ ਸਾਧਗੁਰ ਨੇ ਜਿੱਤਿਆ ਹਰ ਗੁਰ ਦਾ ਉਹਨੂੰ ਸਾਧਗੁਰ ਸਾਧਗੁਰ ਤੇ ਨਾਮ ਪਾਇਆ ਜਾਏ ਇਹ ਮਾਇਆ ਸੁਰੇਤਰ ਕੀਤਾ ਪਹਿਲਾ ਸਤਗੁਰ ਦੇ ਅੱਗੇ ਆਪਣੀ ਪ੍ਰਾਰਥਨਾ ਦੇ ਕੇ ਸੁਰੇਤਰ ਕੀਤਾ ਤਾਂ ਇਹ ਰਿਆ ਤਾਂ ਪਹਿਲਾ ਜਿਹੜਾ ਸਤਗੁਰ ਹੈ ਇਹਦੇ ਬਿਨਾਂ ਲੋਭ ਦੀ ਮਿਲਦਾ ਸੱਚ ਨਹੀਂ ਮਿਲਦਾ ਕਿਸੇ ਨੂੰ ਆ ਗੱਲ ਕਹੀ ਹੋਈ ਹੈ ਇਹ ਨਾ ਮਿਲਿਆ ਕਿੱਥੋਂ ਇਹ ਬੰਦਿਆ ਹਰ ਗੁਰ ਦਿਆ ਹਰ ਗੁਰ ਮਿਲਿਆ ਹਾਂ ਸਤਿਗੁਰ ਤੇ ਰੁਕ ਪਾਇਆ ਜਾਏ ਠੀਕ ਹੈ ਜੀ ਸਤ ਸਤਪੁਰਖ ਕਹਿੰਦਾ ਸਤਪੁਰਖ ਜਿਹਨੂੰ ਜਾਣ ਰਿਹਾ ਸਤਗੁਰ ਉਸ ਨੂੰ ਬਦਲਾ ਸਤਪੁਰਖਾ ਪਾਲਾ ਬੁੱਧਪੁਰਖ ਬੁੱਧਪੁਰਖ ਸਦਾ ਕਰਦਾ ਸਦਾ ਉਹ ਇੱਥੇ ਡੁੱਬਣ ਦਵੇ ਨਾ ਉੱਥੇ ਡੁੱਬਣ ਦਵੇ ਕਿੱਤਾ ਚ ਛਾਂਭਰ ਚ ਪਏ ਸਾਹ ਬਰਕੇ ਡੁੱਬੋ ਲਈ ਦਿੰਦਾ ਇੱਥੇ ਰੋਕ ਤੇ ਤੇਰੇ ਵੀ ਡੁੱਬਣ ਦਿੰਦਾ ਠੀਕ ਹੈ ਫਿਰ ਹਰ ਜਿਹੜਾ ਹੈਗਾ ਹਰ ਗੁਰ ਤੇ ਹਰ ਹਰਤ ਪਲ ਤੇ ਦੋਹੇ ਹਰ ਗੁਰ ਗੱਲਾਂ ਜੀ ਹਰ ਗੁਰਵਾਰੇ ਕੀਆ ਰੱਖਣਾ ਆਲਾ ਜਿਹੜਾ ਦੀਆ ਹੈ ਉਹ ਰੱਖਣਾ ਠੀਕ ਹੈ ਤੇ ਉਹ ਨਿਸ਼ਤਾਰਾ ਕਰਦਾ ਹਾਂ ਉਹ ਹੀ ਕਰਦਾ ਹੁਕਮ ਦੀ ਉਹ ਗੱਲ ਹੋ ਗਈ ਫਿਰ ਹੁਕਮ ਦੀ ਗੱਲ ਹੈ ਜੀ ਹੁਕਮ ਦੀ ਗੱਲ ਤਾਂ ਤੇ ਸਾਰੀ ਠੀਕ ਹੈ ਪਾਵਰ ਸ਼ਕਤੀ ਹੈ ਉਹਦੇ ਕੋਈ ਸ਼ਕਤੀ ਕੋਈ ਸਾਰੀ ਸ਼ਕਤੀ ਉਹਦੇ ਹਾਂ ਅੰਦਰ ਸਭ ਤੋਂ ਬਾਹਰ ਕੋਈ ਜਦ ਕਾਇਰ ਚੱਲ ਕਿਉਂ ਨਾ ਉਹਦੇ ਹੰਕਾਰ ਆਉਗਾ ਹਲਤਪਲ ਉਹਦੀ ਜੋ ਬਿਮਾਰੀ ਹੈ ਠੀਕ ਹੈ ਜੀ ਇੱਥੇ 15ਵੀਂ ਪੌੜੀ ਸਮਾਪਤੀ ਹੈ ਜੀ ਹਾਂ ਜੀ ਹਾਂ